ਸ਼ਲੋਕ ਮਹੱਲਾ ਤੀਜਾ ਗੁਰਮੁਖ ਅੰਮ੍ਰਿਤ ਨਾਮ ਹੈ ਜਿਤ ਖਾਧੇ ਸਬ ਭੁਖ ਜਾਏ ਤ੍ਰਿਸ਼ਨਾ ਮੂਲ ਨਾ ਹੋਵਈ ਨਾਮ ਵਸੈ ਮਨਿ ਆਈ ਗੁਰਮੁਖੀ ਅੰਮ੍ਰਿਤ ਨਾਮ ਹੈ ਗੁਰਮੁਖ ਵਾਸਤੇ ਜਿਹੜਾ ਨਾਮ ਹੈ ਇਹੀ ਅੰਮ੍ਰਿਤ ਹੈ ਇਹਦਾ ਅੰਮ੍ਰਿਤ ਜਿਤ ਖਾਧੇ ਸਭ ਭੁਖ ਜਾਏ ਜਿਸੇ ਖਾਣ ਨਾਲ ਸਾਰਾ ਹਰ ਤਰ੍ਹਾਂ ਭੁੱਖ ਦੂਰ ਹੋ ਜਾਂਦੀ ਹੈ ਸਸਤਾਂ ਦੀ ਭੁੱਖ ਜੀ ਦਾ ਦੂਰ ਹੋਵੇ ਉਹ ਖਾਣਾ ਮਿਲਦਾ ਐ ਹੈ ਚ ਸ਼ਾਬਨ ਇਹਨਾਂ ਦੇ ਛੱਤੀ ਨੇ ਸਾਡਾ ਇੱਕ ਅਮਰਤ ਨਾਮ ਹੈ ਉਹ ਕੰਨਾ ਦਾ ਨਾਮ ਹੈ ਉਹ ਬੁੱਢੀ ਖੁਰਾਕ ਹੈ ਆਤਮਾ ਦੀ ਖੁਰਾਕ ਹੈ ਉਹ ਗੁਰਦੇਵ ਦੀ ਖੁਰਾਕ ਹੈ ਕ੍ਰਿਸ਼ਨਾ ਗੂਲ ਨਾ ਹੋਵੇਈ ਕ੍ਰਿਸ਼ਨਾ ਕਹਿੰਦੇ ਫਾਇਦਾ ਹੀ ਨਹੀਂ ਹੁੰਦੀ ਅੰਦਰ ਤੇ ਕ੍ਰਿਸ਼ਨਾ ਅੰਦਰ ਪਹਿਲਾ ਰਹਿੰਦੀ ਹੋਈਂ ਦੀ ਨਾਮ ਬਸ ਹੈ ਮਨਾਏ ਉਦੀ ਜਗ੍ਹਾ ਨਾਮ ਰਜਾ ਨਾਇ ਦਰਸ਼ਨਾ ਖਤਮ ਜਿਵੇਂ ਅਗ ਬਹੁਤਾ ਪਾਣੀ ਪਾ ਦਈਏ ਪਾਣੀ ਜੇ ਹੋਰ ਖਾਣਾ ਤੇ ਰੋਗ ਲੱਗਾ ਤਨ ਨਾਨਕ ਰਸ ਕਸ ਸ਼ਬਦ ਸਲਾਹਣਾ ਆਪੇ ਲੈ ਮਿਲਾਏ ਬਿਨ ਨਾਮੇ ਹੋਜੇ ਖਾਣਾ ਜਿਹੜੇ ਨਾਮ ਤੋਂ ਬਿਨਾ ਹੋਰ ਗਿਆਨ ਦੇ ਬਹੁਤ ਸਾਰੇ ਗਿਆਨ ਤਰ੍ਹਾਂ ਤਰ੍ਹਾਂ ਦੇ ਨੇ ਉਹ ਖਾਂਦੇ ਦੇ ਖਾਂਦੇ ਕਹਿੰਦੇ ਸ਼੍ਰੀ ਗੁਰੂ ਰਣ ਵੀ ਖਰਾਕ ਹੈ ਬਹੁਤ ਗਿਆਨ ਨੇ ਉਹਨਾਂ ਨੂੰ ਕਹਿੰਦੇ ਨੇ ਨਾਮ ਉਹ ਨਾਮ ਦੇ ਹੈ ਉਹ ਗ੍ਰੰਥ ਬਹੁਤ ਪੜਦੇ ਨੇ ਜਿਵੇਂ શાਸਤਰ ਬਹੁਤ ਹੋਰ ਬਹੁਤ ਜਰਾ ਤ੍ਰਿ ਉਹਨਾਂ ਦਾ ਜਿਹੜਾ ਦਿੱਤ ਰੋਗ ਲੱਗਾ ਤਨ ਧਾਏ ਉਹਦੇ ਨਾਲ ਰੋਗ ਕੀ ਲੱਗਦਾ ਹੋ ਰੋਗ ਹੋਰ ਵੱਧ ਜਾਂਦਾ ਜਿਵੇਂ ਪਾਠ ਪੜ੍ਹੇ ਵਿਚਾਰੇ ਹੋ ਜਿਵੇਂ ਪਰ ਹਮ ਨੂੰ ਤਾਂ ਦੇ ਪੰਜ ਜਨਾਂ ਤੋਂ ਉਹ ਗੱਲ ਹੈ ਹੋਰ ਰੋਗ ਵੱਧ ਜਾਂਦੇ ਨੇ ਗਾਂਡ ਰਸ ਕਾਸ ਸ਼ਬਦ ਸਲਾਹਣ ਆਪੇ ਲੈ ਬਿਲਾਏ ਜਿਹੜੇ ਰਸ ਕਾਸ ਨੇ ਨਾ ਉਹ ਰਸ ਕਾਸ ਦੇ ਸ਼ਬਦ ਸੁਲਾਣ ਸਾਡਾ ਜਿਹੜਾ ਸ਼ਬਦ ਆ ਗੁਰ ਉਪਦੇਸ਼ ਹੈ ਉਹ ਇਹਦੀ ਨਿਗਾਹ ਉਹ ਰਾਸ ਖਾਸ ਨੇ ਜਿਹੜਾ ਸ਼ਬਦ ਹੈ ਸਤ ਅਤਮ ਦੀ ਆਵਾਜ਼ ਜਿਹੜਾ ਸ਼ਬਦ ਮੇਰੇ ਨਾਲ ਤੇ ਸੁਣਿਆ ਉਹ ਸੁਲਾਉਣ ਲਈ ਹੋਊਗਾ ਉਹਦੀ ਜਲਾਣਾ ਚਿੜਚਿੜਾ ਕਰਦੀ ਉਹ ਕਬਲੀ ਸਿਰ ਚਿਲਾ ਕਰਦੀ ਉਹ ਕੋਈ ਨਹੀਂ ਅੰਦਰ ਸਭ ਕੋਈ ਹੈ ਆਪੇ ਲੈ ਬੁਲਾਏ ਬਿਲਾ ਆਪੇ ਲੈਣਾ ਹੁਕਮ ਨੇ ਜੇ ਉਹ ਤੁਸੀਂ ਜਲਾ ਕਰੀਏ ਕਿ ਉਸੇ ਨੂੰ ਮੰਨਿਆ ਸਭ ਤੋਂ ਵੱਡਾ ਆਪ ਹੀ ਉਹਨੇ ਆਪਣੇ ਨਾਮ ਬੁਲਾ ਲਿਆ ਇੱਕ ਦਿਨ ਹੋਜੀ ਮਹੱਲਾ ਤੀਜਾ ਜੀਆਂ जियो, ਜਿਓ ਸ਼ਬਦ ਹੈ ਜਿਤ ਸਹਿ ਮਿਲਾਵਾ ਹੋਏ ਬਿਨ ਸ਼ਬਦ ਹੈ ਜਗ ਹਨੇਰ ਹੈ ਸ਼ਬਦੇ ਪ੍ਰਗਟ ਜੀਵਾਂ ਦੇ ਅੰਦਰ ਜੀ ਹੁੰਦੇ ਨੇ ਜਿਵੇਂ ਮਨੁੱਖ ਦਾ ਜੀਵ ਹੈ ਇਹਦੇ ਅੰਦਰ ਜਿਹੜਾ ਜੀਵ ਹੈ ਨਾ ਇਹਦੇ ਅੰਦਰ ਜੀਵ ਚੱਕ ਜੀਵਨ ਇਹਦਾ ਜੀਵਨ ਸਰੀਰ ਦਾ ਜੀਵਨ ਆਤਮਾ ਹੈ ਆਤਮਾ ਦਾ ਜੀਵਨ ਪਰਾਤਮਾ ਹੈ ਆਤਮਾ ਦਾ ਜੀਵਨ ਪ੍ਰਾਤਮਿਕ ਹੈ ਜੀਵਾਂ ਅੰਦਰ ਜੀਵ ਸਰੀਰ ਜਿਹੜਾ ਜੀਵ ਹੈ ਸਰੀਰ ਜੀਵਤ ਹੈ ਜਿੱਨਾ ਜਿਹੜਾ ਇਹਦੇ ਅੰਦਰ ਆਤਮਾ ਹੈ ਆਤਮਾ ਦੇ ਅੰਦਰ ਆਤਮ ਦੇ ਅੰਦਰ ਪ੍ਰਾਤਮਿਕ ਹੈ। ਸਰੀਰ ਦੇ ਅੰਦਰ ਜੋਤ ਹੈ, ਜਾਤ ਅੰਦਰ ਜੋਤ ਹੈ, ਜੋਤ ਅਸਰੂ ਆਪ ਹੈ। ਜੀਆਂ ਅੰਦਰ ਜਿਉ ਸੰਗੀ ਸ਼ਬਦ ਹੈ। ਉਹ ਸ਼ਬਦ ਰੂਪ ਹੈ। ਉਹ ਸ਼ਬਦ ਰੂਪ ਚ ਹੈ। ਚਿਤ ਸਹ। ਬਿਲਾਵਾ ਉਹ ਸ਼ਬਦ ਨਾਲ ਅੰਤਰਾ ਬੋਲੀ, ਸਭਾ ਕਟ ਰਾਮ ਬੋਲੇ। ਉਹ ਆਵਾਜ਼ ਹੈ ਜਿਹੜੀ ਉਹੀ ਰਾਮ ਜੇ ਉਸ ਉਹਦੇ ਨਾਲ ਸਹਿ ਦਾ ਨਾਮ ਬੁਲਾਵਾ ਹੋਏ ਉਹ ਲੈ ਜਾਂਦਾ ਤੁਰ ਫਿਰ ਬੁੱਧੀ ਨੂੰ ਕਹਿ ਰਿਹਾ ਨਾ ਸਹਿ ਮਲਾਵਾ ਹੋਏ ਉਸ ਉਪਦੇਸ਼ ਤੋਂ ਬਿਨ ਅੰਦਰ ਆਤਮਾ ਦੀ ਆਵਾਜ਼ ਤੋਂ ਬਿਨ ਰੋਹ ਜੁੜੇ ਤੋਂ ਬਿਨ ਜਿਹੜੇ ਹੋਰ ਸ਼ਬਦ ਦੇ ਤਿਰਕੁੱਢੀ ਚੋਂ ਪੈਦਾ ਹੋਏ ਹੋਏ ਬਤਨ ਇਹ ਉਪਦੇਸ਼ ਨੇ ਆਦਮੀ ਨੇ ਆਪਣੀ ਬੁੱਧੀ ਨਾਲ ਜਿਹੜੇ ਪੈਦਾ ਕੀਤੇ ਨੇ ਉਹ ਹਨੇਰਾ ਉਹ ਉਹ ਚੱਲ ਨਹੀਂ ਕਰ ਸਕਦੇ ਦੂਰ ਉਹ ਪਰਮ ਦੇ ਵਿੱਚ ਹੀ ਰੱਖਦੇ ਉਹਦੇ ਨਾਲ ਪਰਮ ਦੂਰ ਨਹੀਂ ਹੋ ਸਕਦਾ ਭਾਈ ਬੁੱਢੋ ਤੇ ਗੁਰੂ ਕੀ ਜਾਤੇ ਪਰਮ ਨਾਲ ਜਾਏ ਪਰਮਤਾਂ ਦੇ ਵਿੱਚ ਪਰਮ ਦੀ ਦੂਰ ਹੋ ਸਕਦਾ ਤੇਰਾ ਰਹੂਗਾ ਹੀ ਰਹੂ ਹਨੇਰਾ ਸ਼ਬਦ ਪ੍ਰਗਟ ਹੋਏ ਜਿਹੜਾ ਸ਼ਬਦ ਹੈ ਗੁਰੂ ਦਾ ਇਹਦੇ ਨਾਲੇ ਗੱਲ ਸਮਝ ਆਉਂਦੀ ਆ ਵੀ ਹਨੇਰ ਹੈ ਉਹਨੂੰ ਦੱਸਦਾ ਜਿੰਨਾ ਚਿਰ ਗੁਰਬਾਣੀ ਨਹੀਂ ਸੁਣਦੇ ਉਹ ਮਤਾਂ ਉਹਨਾਂ ਚ ਸੱਚ ਲੱਗਦੀਆਂ ਨੇ ਉਹਨਾਂ ਜਿੰਨੀ ਉਹਨਾਂ ਨਹੀਂ ਸਮਝ ਆ ਸਕਦੀ ਉਹਨਾਂ ਚ ਕبھی ਉਹਨਾਂ ਦੀ ਕਵਿਤਾ ਆ ਸ਼ਬਦ ਪ੍ਰਗਟ ਕਰਦਾ ਗੁਰ ਉਪਦੇਸ਼ ਪ੍ਰਗਟ ਕਰਦਾ ਉਹਨਾਂ ਚ ਕੀ ਕਮੀ ਆ ਵਾਕਈ ਉਹਨਾਂ ਚ ਹਨੇਰ ਹੈ ਉਹਨੇ ਰੱਬ ਫੇਰ ਪ੍ਰਗਟ ਹੁੰਦਾ ਕਿ ਗੁਰਬਾਣੀ ਦਾ ਉਪਦੇਸ਼ ਸੁਣਦੇ ਆ ਸਮਝਦੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਜਦੋਂ ਵੀ ਕਰੋੜਾ ਤੋਂ ਨਹੀਂ ਹੋਰਾਂ ਦੀ ਮਗਲ ਲੱਗੀ ਹੋਈ ਹੈ ਅਰਬਾਂ ਤੋਂ ਨਹੀਂ ਉਹਨਾਂ ਦੀ ਮਗਲ ਲੱਗੀ ਹੋਈ ਹੈ ਬੁੱਧਰੀ ਉਹਨਾਂ ਨੂੰ ਨਹੀਂ ਉਹ ਜੀ ਜੀ ਸ਼ਬਦ ਹੈ ਕਹਿੰਦਾ ਮਤਲਬ ਮਨ ਵਿੱਚ ਆਪਣੇ ਮਨ ਆਪਣੇ ਮਾਹ ਜਿਤ ਸਹਿ ਮਿਲਾਵਾ ਹੋਵੇ ਵੀ ਜੇ ਉਹਦੇ ਨਾਲ ਮਿਲਾਵਾ ਹੋ ਜਾਵੇ ਬੁੱਧੀ ਦਾ ਬੁੱਧੀ ਜੇ ਉਹ ਸ਼ਬਦ ਦੇ ਨਾਲ ਵਿੜੇ ਸਰ ਗੁਰਮੁਖੀ ਬਾਕੇ ਟੋਕ ਦੇ ਜਾ ਕੇ ਸ਼ਬਦ ਗੁਰੂ ਨਾਲ ਜੁੜਦੀ ਹੈ ਤਾਂ ਪਹਿਲਾਂ ਇਹਦੇ ਨਾਲ ਮਿਲਾਵਾ ਹੋਣਾ ਐਨੇ ਫਿਰ ਜਦ ਇੱਕ ਹੋ ਗਏ ਇਹਨਾਂ ਨੇ ਸ਼ਬਦ ਗੁਰੂ ਨਾਲ ਮਿਲਣਾ ਫਿਰ ਇੱਕ ਹੋ ਜਾਂਦੇ ਹਾਂ ਫਿਰ ਅੰਦਰੋਂ ਘਟੜਟ ਔਰ ਇਹ ਵਾਲੇ ਜਗਤ ਨੂੰ ਮੋਢੀਆਰ ਪੰਡਿਤ ਵਿਖਾ ਦੇ ਸਿੰਮਰ ਸਾਧਰ ਪੜ੍ਹ ਪੜ ਥੱਕ ਗਏ ਉਹਨਾਂ ਨੂੰ ਸਮਝ ਨਹੀਂ ਆਈ ਵੀ ਇਹ ਥੱਕ ਗਏ ਸਾਦੇ ਸਰੀਰ ਉਹਨਾਂ ਆਖਰ ਉਹਤ ਹੋ ਗਈ ਦੇਖ ਤੱਕੇ ਤੰਤ ਹੋਏ ਇਹ ਜਿਹੜੇ ਪੇਠੀ ਸੀ ਸਾਧ ਇਹ ਸਰੀਰ ਨੂੰ ਧੋ ਤੋ ਕੇ ਥੱਕ ਗਏ ਪ੍ਰਾਪਤੀ ਕੁਝ ਵੀ ਨਹੀਂ ਹੋਈ ਬਿਨ ਸੱਬਦੇ ਕਦੇ ਨਾ ਪਾਇਓ ਐਸ ਸ਼ਬਦ ਤੋਂ ਉਪਦੇਸ਼ ਤੋਂ ਬਿਨਾ ਮਨ ਤੇ ਆਤਮਣ ਦੀ ਆਵਾਜ਼ ਤੋਂ ਬਿਨਾਂ ਕਿਦੋਂ ਕਿਦਰ ਕੁਝ ਵੀ ਪ੍ਰਾਪਤੀ ਨਹੀਂ ਹੋਈ। ਦੁਖੀ ਇਹ ਚੱਲੇ ਰੋਏ, ਦੁਖੀ ਤੇ ਦੁਖੀ ਰਹੇ ਸਾਰਾ ਸਾਰੀ ਜ਼ਿੰਦਗੀ ਔਰ ਰੋ ਕੇ ਚੱਲੇ ਕਿ ਕੁਝ ਮਿਲਿਆ। ਜਦ ਗੁਆ ਕੇ ਚਲੇ ਗਏ, ਰੋ ਕੇ ਗਏ ਦੇਥੋਂ। ਖੁਸ਼ੀ ਦੀ ਖੁਸ਼ੀ ਦੀ ਗਿਆ ਕੋਈ ਵੀ। ਨਾਨਕ ਨਦਰੀ ਪਾਈਐ ਕਰਮੀ ਪ੍ਰਾਪਤ ਹੋਈ। ਨਾਨਕ ਜੰਦੋ ਦੀ ਮਿਹਰ ਨਾਲ ਉਹਦੀ कृपा ਨਾਲ ਪ੍ਰਾਪਤੀ ਹੈ ਅਸੀਂ ਉਹਦੀ ਕਿਰਪਾ ਪ੍ਰਾਪਤ ਕਿਵੇਂ ਕਰ ਲਈਏ ਸਵਾਲ ਹੈ ਨਦਰ ਨਦਰ ਦੇ ਹਾਲ ਪਰ ਉਹਦੀ ਬਿਹਰ ਪ੍ਰਾਪਤੀ ਜਿਵੇਂ ਹੋ ਇਹ ਭੇਜ ਹੈ ਜਿਹੜਾ ਇਹ ਗੁਰਬਾਣੀ ਦੱਸਦੀ ਹੈ ਉਹਦੇ ਹੁਕਮਾਂ ਚੱਲੇ ਤੇ ਪ੍ਰਾਪਤ ਹੋਊਗਾ ਬਾਹਾਂ ਬੰਦੇ ਤੇ ਨਦਰ ਪ੍ਰਾਪਤ ਹੋਊਗੀ ਕਿਰਪਾ ਦਾ ਪਾਤਰ ਬਣੂਗਾ ਕਰਮੇ ਪ੍ਰਾਪਤ ਹੋਏ ਇਹਦਾ ਕਰਮ ਜਿਹੜਾ ਹੈ ਇਹ ਤਾਂ ਆਪਣੇ ਪਾਣੀ ਚੱਲੂਗਾ ਫਿਰ ਤਾਂ ਪ੍ਰਾਪਤੀ ਦੀ ਗੁਰ ਤੇ ਪਾਣੀ ਚੱਲੂਗਾ ਪ੍ਰਾਪਤੀ ਹੈ ਇਹਦਾ ਇਥੋਂ ਕਰਮ ਬਦਲੂਗਾ ਇਹਦੀ ਸੋਚ ਬਦਲੂਗੀ ਸੋਚ ਬਦਲਾਵਾ ਤੇ ਪ੍ਰਾਪਤੀ ਹੈ ਤੇ ਗੁਰ ਦੇ ਪਾਣੀ ਚੱਲਣ ਨਾਲ ਬਖਸ਼ਿਸ਼ ਬਣ ਜਾਏਗਾ ਕਰਮ ਮੇਰੇ ਪ੍ਰਭ ਪਾਇਆ ਇਸ ਤ੍ਰਿਪੁਰਖਿਆਤ ਨੇ ਇਸ ਤ੍ਰਿਪੁਰਖ ਦਾ ਬੇ અતਯੰਤ ਆਪਸ ਵਿੱਚ ਜੇ ਹੁੰਦਾ ਪ੍ਰੇਮ ਹੁੰਦਾ ਸਤਿਗੁਰੂ ਪ੍ਰੇਮ ਰਾਇਣੋਂ ਨੇ ਹੈ ਪਕਾਇਆ ਬਹਿ ਕੇ ਗੱਲਾਂ ਬਾਹਦੀਆਂ ਕਰਦੇ ਨੇ ਤੇ ਥਾਰੀ ਤੇ ਥਾਰੀ ਗੱਲਾਂ ਕਰਦੇ ਰੇ ਤਾ ਕਾਹ ਦੀ ਗੱਲ ਦੀ ਕਰਦੇ ਬਾਹਰ ਇਸ ਤ੍ਰਿਪੁਰਖ ਦੇ ਜਿਹੜੇ ਤੇ ਪਕਾਇਆ ਵੱਲ ਦਾ ਉਹ ਆਏ ਜਿਹੜਾ ਸਾਡੇ ਫਾਇਦੇ ਚ ਨਾ ਹੋਵੇ ਅੱਗੇ ਵਾਸਤੇ ਪਰਲੋਕ ਵਾਸਤੇ ਜਿਹੜਾ ਸਾਨੂੰ ਲਾਭਦਾਇਕ ਨਾ ਹੋਵੇ ਉਹ ਮੰਨਦਾ ਹੈ ਚਾਹੇ ਇੱਥੇ ਵਾਸਤੇ ਚੱਭਾ ਵੀ ਹੋਵੇ ਜੇ ਸਾਖ ਚੱਲ ਜਿਹੜਾ ਦੀਨ ਸਾਨੂੰ ਅੱਖਾਂ ਨਾ ਹੋਰ ਜੇ ਦੀ ਗੱਲ ਕਰਦੇ ਨੇ ਇਹਦੇ ਵਾਸਤੇ ਸਭ ਕੁਝ ਸਲਾਮਾ ਚੁੱਲਾ ਕਰ ਦੇਣਗੇ ਇਹ ਤਾਂ ਚੱਲਣਾ ਆ ਰਿਹਾ ਸਭ ਕੁਝ ਰਹਿਣ ਵਾਲਾ ਹੀ ਨਹੀਂ ਮੇਰੇ ਪ੍ਰਭ ਆਇਆ ਮੇਰੇ ਪ੍ਰਭ ਨੂੰ ਇਹੀ ਭਾਉਂਦਾ ਹੁਕਮ ਨਾਦਾ लाभदायक यही परमों तो यही है वे जो दीन और रहना कोई दी जो रहना लिए थे खातिर उन्होंने सलाह मशवरा है तो फिर कोई सलाह मशवरा लाभदायक है दी ये चंदा नहीं है जो चंदा नहीं हो है वो होता ही होता है क्यों रहिए थिर जग को कड्डो उपाय गुरु की चाकरी ਫਿਰ ਕੰਧ ਸਭਾਇਆ ਕਿਮ ਰਈਆ ਫਿਰ ਜੰਗ ਜੰਗ ਦੇ ਵਿੱਚ ਫਿਰ ਕਿਵੇਂ ਰਹੀਏ ਦੇਖੋ ਜੰਗ ਦੇ ਵਿੱਚੇ ਫਿਰ ਰਹਿਣਾ ਫਰੀਦ ਨਹੀਂ ਰਹਿਣਾ ਰਹਿਣਾ ਜੰਗ ਦੇ ਵਿੱਚੇ ਫਿਰ ਕੋ ਕਢੋ ਉਪਾਇ ਐਸਾ ਕੋਈ ਉਪਾਇ ਕਢੋ ਫਿਰ ਸਮਝ ਲਗੇ ਕੋ ਕਢੋ ਉਪਾਇ ਗੁਰਪੂਰੇ ਕੀ ਚੱਕਰੀ ਫਿਰ ਕੰਧ ਸਭਾਇਆ ਗੁਰਪੂਰੇ ਦੀ ਚੱਕਰੀ ਕਰੋ ਜੇ ਪੂਰੇ ਗੁਰਦੀ ਤੇ ਚੱਕਰੀ ਕਰੇ ਸਰਕੰਦ ਸੁਭਾਇਆ ਫਿਰ ਫਿਰ ਹੋ ਸਕਦਾ ਸਾਰੇ ਹੀ ਹੋ ਸਕਦੇ ਨੇ ਇਥੇ ਪਰ ਆਹ ਸ਼ਰੀਰ ਕਰਕੇ ਨਹੀਂ ਹੋਣਾ ਫਿਰ ਸ਼ਰੀਰ ਤਾਂ ਕਲਰ ਦੀ ਗੰਧ ਹੈ ਜਿਹੜੀ ਆਤਮਾ ਰੂਪੀ ਗੰਧ ਹੈ ਉਹ ਦੀ ਬੇਟਾਈ ਫਿਰ ਮਹਿਲ ਬਣ ਜੂ ਉਹ ਫਿਰ ਮਹਿਲ ਰੂਪ धारण ਕਰ ਜੂ ਫਿਰ ਦੀ ਗਿਰਦੀ ਕਰ ਫਿਰ ਇਹ ਫਿਰ ਕਿਹੜੀ ਚੰਦ ਹੈ ਜੀ ਵਹਿਲ ਅੱਛਾ ਜੀ ਭਲਾ ਪਹਿਲਾ ਭਲਾ ਦੂਜਾ ਜੀ ਨਾਨਕ ਬਖਸ਼ ਮਿਲਾਇਨ ਹਰ ਨਾਮ ਸਮਾਇਆ ਨਾਨਕ ਜਿਹੜੇ ਬਖਸ਼ ਇਹ ਲੋਕ ਬਖਸ਼ੇ ਜਾਂਦੇ ਨੇ ਬਖਸ਼ੇ ਜਾਂਦੇ ਨੇ ਜਿੱਤਾ ਬੁਲਾਇਆ ਜਾਂਦੇ ਨੇ ਕਪੜੇ ਨਾਲ ਭਲਾਇਆ ਹਰ ਨਾਮ ਸਮਾਇਆ ਹਰ ਨਾਮ ਦੇ ਵਿੱਚ ਸਮਾ ਜਾਂਦਾ ਹੈ ਤੇ ਸੰਭਾਸ਼ੀ ਹੋ ਜਾਂਦੀ ਹੈ ਉਹ ਹਰ ਰੋਜ਼ ਬਿੜ ਜਾਂਦੇ ਨੇ ਆਪਣੇ ਘਰ ਚਲੇ ਜਾਂਦੇ ਨੇ ਠੀਕ ਹੈ ਜੀ ਐਥੇ 33ਵੀਂ ਪੌੜੀ ਸਮਾਪਤੀ ਹੈ ਜੀ